ਪਾਦ ਹਸਤ ਆਸਨ ਕਰਾਂਗੇ ਪਾਦ ਹਸਤ ਆਸਨ ਕਰਨ ਨਾਲ ਕਮਰ ਦਰਦ ਮੋਟਾਪਾ ਸਰਵਾਈਕਲ ਸ਼ੂਗਰ ਅਤੇ ਲੱਤਾਂ ਦੇ ਦਰਦ ਵਾਸਤੇ ਬਹੁਤ ਹੀ ਲਾਭਕਾਰੀ ਹੈ ਇਹ ਪਾਦ ਹਸਤ ਕਮਰ ਦੀ ਦਰਦ ਵਾਲੇ ਜਾਂ ਰੀੜ ਦੀ ਤਕਲੀਫ ਵਾਲੇ ਸੱਜਣ ਅੱਗੇ ਨਾ ਝੁਕਣ ਹੁਣ ਪੈਰਾਂ ਦਾ ਫਾਸਲਾ 5-6 ਇੰਚ ਕਰ ਲਓ ਸਵਾਸ ਨੂੰ ਪਰਦੇ ਹੋਏ ਦੋਹਾਂ ਹੱਥਾਂ ਨੂੰ ਆਸਮਾਨ ਦੀ ਤਰਫ ਲੈ ਜਾਓ ਹੱਥਾਂ ਦੀਆਂ ਤਲੀਆਂ ਦਾ ਰੁਖ ਸਾਹਮਣੇ ਦੀ ਤਰਫ ਰਹੇਗਾ ਥੋੜਾ ਪਿੱਛੇ ਨੂੰ ਚੁੱਕੋ ਵਾਪਸ ਹੁਣ ਅੱਗੇ ਨੂੰ ਚੁੱਕਦੇ ਜਾਓ ਸਵਾਸ ਨੂੰ ਬਾਹਰ ਕੱਢਦੇ ਹੋਏ ਦੋਹਾਂ ਹੱਥਾਂ ਨੂੰ ਜ਼ਮੀਨ ਦੀ ਸਾਈਡ ਲੈ ਆਓ ਦੋਹਾਂ ਪੈਰਾਂ ਦੇ ਸੱਜੇ ਤੇ ਖੱਬੇ ਹੱਥਾਂ ਦੀਆਂ ਤੜੀਆਂ ਮੁੱਢੀਆਂ ਜ਼ਮੀਨ ਤੇ ਮਾਰ ਦਿਓ ਮੱਥਾ ਵੱਧ ਤੋਂ ਵੱਧ ਗੋਡਿਆਂ 'ਵਾਲ ਚੁਕਾ ਕੇ ਰੱਖੋ ਸਵਾਸ ਬਾਹਰ ਰਹੇਗਾ ਵਾਪਸ ਫਿਰ ਸਿੱਧੇ ਹੋ ਜਾਓ ਦੋਹਾਂ ਹੱਥਾਂ ਨੂੰ ਫਿਰ ਆਸਮਾਨ ਦੀ ਤਰਫ ਲੈ ਜਾਓ ਸਵਾਸ ਨੂੰ ਪਰਦੇ ਹੋਏ ਥੋੜਾ ਪਿੱਛੇ ਚੁਕੋ ਹੁਣ ਸਾਹ ਨੂੰ ਬਾਹਰ ਕੱਢਦੇ ਹੋਏ ਦੁਬਾਰਾ ਫੇਰ ਅੱਗੇ ਚੁੱਕਦੇ ਜਾਓ। ਦੋ ਹੱਥਾਂ ਨੂੰ ਜ਼ਮੀਨ ਤੇ ਲਗਾ ਦਿਓ। ਸਾਹ ਬਾਹਰ। ਵਾਪਸ ਹੱਥ ਉੱਪਰ ਲੈ ਜਾਓ। ਇੱਕ ਵਾਰੀ ਹੱਥਾਂ ਨੂੰ ਉੱਪਰ ਖਿੱਚੋ। ਹੁਣ ਦੋਹਾਂ ਹੱਥਾਂ ਨੂੰ ਹੌਲੀ-ਹੌਲੀ ਵਾਪਸ ਥੱਲੇ ਲਿਆ ਹੁਣ ਕਰਾਂਗੇ ਤ੍ਰਿਕੋਣ ਆਸਨ ਕਮਰ ਦਰ ਰੀੜ ਦੀ ਹੱਡੀ ਵਿੱਚ ਲਚਕ ਪੈਦਾ ਕਰਨ ਲਈ ਚਰਬੀ ਘਟਾਉਣ ਲਈ ਮੋਟਾਪੇ ਅਤੇ ਛਾਤੀ ਦੇ ਰੋਗਾਂ ਵਿੱਚ ਬਹੁਤ ਹੀ ਲਾਭਕਾਰੀ ਹੈ ਤ੍ਰਿਕੋਣ ਆਸਨ ਦੋਹਾਂ ਪੈਰਾਂ ਦਾ ਫਾਸਲਾ 1 ਫੁੱਟ ਕਰ ਲਓ सज्जे ਹੱਥ ਨੂੰ ਆਸਮਾਨ ਵੱਲ ਲੈ ਜਾਓ ਹੱਥ ਦੀ ਤੜੀ ਦਾ ਰੋਖ पासे कर लो, ਕਰ ਲਓ दी ਹੱਥ ਦੀ ਤੜੀ ਪੱਟਣਾ ਲੱਗੀ ਰਹੇ ਹੁਣ ਸਾਹਸ ਨੂੰ ਬਾਹਰ ਕੱਢਦੇ ਹੋਏ ਸਾਰੇ ਸਰੀਰ ਨੂੰ ਖੱਬੇ ਪਾਸੇ ਝੁਕਾ ਦਿਓ ਹੱਬਾ ਹੱਥ ਪੱਟਦੇ ਨਾਲ ਹੀ ਥੱਲੇ ਵਾਪਸ ਸਵਾਸ ਅੰਦਰ ਲੈਂਦੇ ਹੋਏ ਵਾਪਸ ਹੁਣ ਸੱਜੇ ਹੱਥ ਨੂੰ ਥੱਲੇ ਲਿਆਓ ਅਤੇ ਖੱਬੇ ਹੱਥ ਨੂੰ ਆਸਮਾਨ ਦੀ ਤਰਫ ਲੈ ਜਾਓ ਪਹਿਲਾਂ ਦੀ ਤਰ੍ਹਾਂ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸੱਜੇ ਪਾਸੇ ਚੁੱਕ ਜਾਓ ਵਾਪਸ ਵਾਲਾ ਹੱਥ ਨੇ ਲੈ ਆਓ ਥੱਲੇ ਵਾਲਾ ਹੱਥ ਉੱਪਰ ਲੈ ਜਾਓ ਹੁਣ ਦੂਜੀ ਸਾਈਡ ਚੁੱਕ ਜਾਓ ਖੱਬੀ ਸਾਈਡ ਵਾਪਸ ਸਿੱਧੇ ਹੋ ਜਾਓ ਹੁਣ ਖੱਬਾ ਹੱਥ ਉੱਪਰ ਲੈ ਜਾਓ ਸਦੀ ਸਾਹਿਬ ਚੁੱਕ ਜਾਓ ਸਵਾਸ ਨੂੰ ਬਾਹਰ ਕੱਢਦੇ ਹੋਏ ਵਾਪਸ ਦੋਵੇਂ ਹੱਥ ਥੱਲੇ ਦੋਵੇਂ ਹੱਥਾਂ ਵਿੱਚ ਹੁਣ ਦੋਵਾਂ ਹੱਥਾਂ ਨੂੰ ਸਾਹਮਣੇ ਫੈਲਾ ਲਓ ਹੌਲੀ ਹੌਲੀ ਆਪਣੇ ਸਥਾਨ ਤੇ ਬੈਠੋ ਜਿਤਨਾ ਤੀਰਜ ਨਾਲ ਆਪਣੇ ਸਥਾਨ ਤੇ ਬੈਠੋਗੇ ਉਤਨਾ ਹੀ ਜ਼ਿਆਦਾ ਆਪ ਜੀ ਨੂੰ ਲਾਭ ਗੋਡਿਆਂ ਦੀਆਂ ਦਰਦਾਂ ਵਾਸਤੇ ਵੀ ਬਹੁਤ ਇਹ ਕਿਰਿਆ ਅੱਛੀ ਹੈ ਬਜਰਾਸਨ ਤੇ ਬੈਠਾਂਗੇ ਗੋਡੇ ਮੂਦੇ ਮਾਰ ਕੇ ਬਜਰਾਸਨ ਇੱਕ ਐਸਾ ਆਸਣ ਹੈ ਜਿਹੜਾ ਰੋਟੀ ਖਾਣ ਤੋਂ ਤੁਰੰਤ ਬਾਅਦ ਕੀਤਾ ਜਾ ਸਕਦਾ ਹੈ ਜਮੀਨ ਤੇ ਵਾਪਸ ਆਉਂਦੇ ਸਾਤ ਆਪਣੇ ਗੋਡੇ ਮੂਦੇ ਮਾਰ ਕੇ ਬਜਰਾਸਨ ਤੇ ਬੈਠ ਜਾਓ ਪੈਰਾਂ ਦੇ ਅੰਗੂਠੇ ਆਪਸ ਵਿੱਚ ਮਿਲ ਜਾਣ ਕਮਰ ਅਤੇ ਗਰਦਨ ਸਿੱਧੀ ਰੱਖੋ ਬਜਰਾਸਨ ਪੋਜਨ ਨੂੰ ਹਜਮ ਕਰਨ ਵਾਸਤੇ ਬਹੁਤ ਹੀ ਸਹਾਇਕ ਹੈ ਇਹ ਸਾਸਤਣਾਰ ਬਦਹਜਮੀ ਬਲੱਡ ਪ੍ਰੈਸ਼ਰ ਕਬਈ ਦੂਰ ਹੁੰਦੀ ਹੈ ਅਤੇ ਪਾਚਨ ਸ਼ਕਤੀ ਵੀ ਸ਼ਕਤੀਸ਼ਾਲੀ ਬਣਦੀ ਹੈ ਹੁਣ ਬਜਰਾਸਨ ਚ ਬੈਠੇ ਬੈਠੇ ਸ਼ਿਸ਼ਾਂਕ ਆਸਨ ਕਰਾਂਗੇ ਇਸ ਨਾਲ પેટ ਦਾ ਮੋਟਾਪਾ પેટ ਗੈਸ ਨੂੰ ਬਹੁਤ ਹੀ ਫਾਇਦੇਮੰਦ ਸ਼ਿਸ਼ਾਂਕ ਆਸਨ ਨਾਲ ਹਰਨੀਆਂ ਨੂੰ ਵੀ ਬਹੁਤ ਲਾਭ ਮਿਲਦਾ ਹੈ ਹੁਣ ਸ਼ਿਸ਼ਾਂਕ ਆਸਨ ਦੀ ਪਹਿਲੀ ਵਿਧੀ ਕਰਨ ਜਾ ਰਹੇ ਹਾਂ ਦੋਹਾਂ ਹੱਥਾਂ ਦੀ मुट्ठी ਬੰਦ ਕਰੋ ਅੰਗੂਠੇ ਵਿੱਚ ਰੱਖੋ ਦੋਹਾਂ ਮੁੱਠਾਂ ਨੂੰ ਤੁਨੀ ਦੇ ਥੱਲੇ ਰੱਖ ਲਓ ਸਵਾਸ ਨੂੰ ਬਾਹਰ ਕੱਢਦੇ ਹੋਏ ਆਪਣਾ ਮੱਥਾ ਜ਼ਮੀਨ ਦੀ ਸਾਈਡ ਚੁਕਾ ਲਓ सांस बाहर वापस होली होली सीधे हो जाओ